ਕੋਜਤ ਕੋਜਤ ਅੰਮ੍ਰਿਤ ਪੀਆ ਖਿਵਾ ਗਈ ਮਨ ਸਤਗੁਰ ਦੀਆ ਅਜੇ ਵੀ ਕੋਜਤ ਕੋਜਤ ਕੋਜਦੇ ਕੋਜਦੇ ਕੋਜਦੇ ਅਗਰ ਅੰਮ੍ਰਿਤ ਤੱਕ ਪਹੁੰਚ ਗਏ ਪਤਾ ਲੱਗ ਗਿਆ ਗੁਰਤ ਹੈ ਪਤਾ ਲੱਗ ਗਿਆ ਅੰਮ੍ਰਿਤ ਤਾਂ ਪੀਤਾ ਬੱਝਲੀ ਹੋ ਗਈ ਐ ਪੀਤਾ ਸੱਚ ਫਰਨਾ ਕਈ ਰੂਪ ਸਜਦੇ ਆਏ ਸੱਚ ਲੱਗਦਾ ਸੀ ਸੱਚ ਵਰਗਾ ਕਿ ਤਾਚੋ ਅੱਛਾ ਜੀ ਕੁਛ ਸ਼ਤਰਪੂਰੀ ਦੀ ਜ਼ਿਕਰ ਕਰ ਸਕਦੀ ਹੋ ਹੋ ਜੇ ਤੋ ਕੋਈ ਤਬਸ ਪੀਆ ਚਿੱਲਾ ਗਈ ਬਰਸਤ ਕਰਦੀ ਨਾ ਗਈ ਸਭ ਕੁਝ ਚਾਹਤਾ ਸਭ ਚਰਤਾ ਅਸਾਜਿ ਬਿਨਿਆ ਸਭ ਕੁਝ ਅਨਲਾ ਸਭ ਦੇ ਪੁਰਸਾਦ ਗੁਰਦੀਆ ਪੁਰਸਾਦ ਗੁਰੂਦੇਸ ਅੱਛਾ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੋ ਵਿਚਾਰੇ ਹੋਏ ਕਰੋ ਕਰੋ ਸੋਕਨਾਂ ਕੇ ਮਤੇ ਬਹੁਤ ਸੱਚੇ ਦਾ ਪੀਤਾ ਬ੍ਰਤ ਸਾਰੇ ਕਹਿਣ ਲੱਗੇ ਖਰਾ ਗੱਲ ਖੜੀ ਕਰਦੇ ਉਹਨਾਂ ਕੋ ਕੋਟ ਨਹੀਂ ਆਉਂਦੂ ਸਰਦਾ ਸਰਦਾ ਖਿਰਦ ਕੋਏ ਖਰਾ ਰਤਨ ਜੁ ਵਿਚਾਰੇ ਹੋਏ ਚਾਲਨ ਜੁਗ ਕੋ ਖਰਾ ਰਤਨ ਰਹਿ ਜਾ ਕੋ ਇੱਕੋ ਰੂਪ ਰਹਿੰਦਾ ਹੈ ਕੋ ਰੂਪ ਰਹਿੰਦਾ ਉਹਦਾ ਬਦਲਦਾ ਹੈ ਅੱਛਾ ਜੁਗ ਕੋ ਚਾਹੇ ਸਤਿਗੁਰੂ ਚਾਹੇ ਤ੍ਰੇਤਾ ਚਾਹੇ ਚਾਹੇ ਕਲਯੁਗ ਹੈ ਬਾਰ ਬਾਰ ਠੀਕ ਹੈ ਜੀ ਖਾਤ ਪੀਅੰਤ ਮੂਵੇ ਨਹੀਂ ਜਾਣਿਆ ਕਿਨਵੇਂ ਮੂਵੇ ਜਾਂ ਸ਼ਬਦ ਪਛਾਨਣਿਆ ਜਿੰਨੇ ਜਿਹੜੇ ਖਾਂਦੇ ਪੀਂਦੇ ਰਹੇ ਬੰਦੇ ਜੁਮਦੇ ਰਹੇ ਨਹੀਂ ਜਾਣੇ ਕਿਵੇਂ ਜਿਹਦੇ ਵੀ ਜਾਲ ਪਛਾਲ ਦੇ ਅਸਲ ਜਾਂ ਜਗੁਰੇ ਆ ਖਾਣੇ ਪੀਣੇ ਬੰਦ ਨੇ ਸ਼ਰੀਰ ਕਰਕੇ ਮਰਨ ਦੀ ਹੈ ਬੰਨ ਦਾ ਜਨ ਪਤਾ ਲੱਗਿਆ ਜਾਂ ਸ਼ਬਦ ਦੇ ਵਿੱਚ ਉਹਦੇ ਵਿੱਚ ਪਛਾਲ ਲਈ ਗੋਦੀ ਦਾ ਕੀ ਹੈ ਕੀ ਨੂੰ ਬੰਦ ਹੋਸੀ ਸੀ ਸ਼ਬਦ ਪਛਾਲਦੇ ਇਹਦੇ ਚ ਸਲ ਜਾਈ ਸ਼ਬਦ ਵਿੱਚ ਗੁੰਦਰਦੀ ਦਿਲ ਵਿੱਚ ਵਰ ਗਏ ਜਾਂ ਸ਼ਬਦ ਬਚਾਦੇ ਠੀਕ ਹੈ ਜੀ ਅਸਥਿਰ ਚੀਤ ਮਰਨ ਮਨ ਮੰਨਿਆ ਗੁਰ ਕਿਰਪਾ ਤੇ ਨਾਮ ਪਛਾਨਿਆ ਗੁਰ ਕਿਰਪਾ ਤੇ ਚੀਤ ਚਿੱਤ ਜਿਹੜਾ ਥਿਰ ਹੋ ਗਿਆ ਦੇਖੋ ਗਿਆ ਮੂਰਤ ਵਸ ਮੱਤੇ ਹੋ ਗਿਆ ਦੇਖਦੇ ਜੇ ਜਬ ਬੰਦ ਬੰਦ ਬੋਲਿਓ ਜਬੰਦ ਬੰਦ ਕੇ ਗੋਦਰ ਜੀ ਆਖ ਰਿਹਾ ਵਰ ਕਿਰਪਾ ਦੇ ਨਾਮ ਪਛਾਣਨੇ ਆ ਬਹੁਤ ਪਛਾਣਦੇ ਉਹ ਗਿਆਨ ਦੀ ਕਿਰਪਾ ਨੂੰ ਲੋਕ ਜੀ ਪਛਾਣਦਾ ਜੀ ਯਾਦ ਲੋਕ ਉਹ ਠੀਕ ਹੈ ਜੀ